ਸਤਗੁਰੂ ਦੇ ਦਰਸ਼ਨ ਤੋਂ ਜਨਮ ਮਰਨ ਕਟਿਆ ਜਾਂਦਾ ਜਿੱਥੇ-ਜਿੱਥੇ ਵੀ ਐਸਾ ਇਤਿਹਾਸ ਅੱਜ ਤੱਕ ਦੁਨੀਆ ਵਿੱਚ ਚਮਕਦਾ ਹੈ ਗੁਰੂ ਕੇ ਦਰਸ਼ਨ ਵਿੱਚ ਇਹ ਸਿਫਤਾਂ ਹਨ ਗੁਰੂ ਕੇ ਦਰਸ਼ਨ ਤੋਂ ਹੀ ਇਹਨਾਂ ਸ਼ਬਦਾਂ ਵਿੱਚ ਹੀ ਆਉਂਦਾ ਦਰਸ਼ਨ ਪਰਸਿਆ ਗੁਰੂ ਕੈ 86 ਮਜਰ ਹੋਏ ਅਠਾ ਅਠਾ ਤੀਰਥਾਂ ਦੇ ਅਸ਼ਨਾਨ ਦਾ ਮਹਾਤਮ ਗੁਰੂ ਕਾ ਦਰਸ਼ਨ ਕਰਨ ਤੋਂ ਹੈ 860 ਤੀਰਥ ਮਜਨਾ ਗੁਰਦర్శਪਾਪਤ ਹੋਏ ਇੱਕ ਪ੍ਰਮਾਣ ਦੀ ਗੁਰਬਾਣੀ ਵਿੱਚ ਬਹੁਤ ਪ੍ਰਮਾਣ ਆਇਆ ਰਿਆ ਸੀ ਸੋ ਮੈਂ ਅਰਜ ਕਰਾਂ ਗੁਰੂ ਨਾਨਕ ਪਾਤਸ਼ਾਹ ਸੰਸਾਰ ਨੂੰ ਉਤਾਰਦੇ ਹੋਏ ਇੱਕ ਵਾਰੀ ਪਿੰਡ ਤਲਵੰਡੀ ਆਏ ਆਪਣੇ ਪਿੰਡ ਵਿੱਚ ਸਤਿਗੁਰਾਂ ਦੇ ਆਉਣ ਦੀ ਖਬਰ ਜਿਹੜੀ ਸੀ ਉਹ ਤਾਰਵਾਂਜ ਫਿਰ ਗਈ ਮੈਂ ਕਾਲੂ ਮਾਤਾ ਤ੍ਰਿਪਤਾ ਘਰ ਵਿੱਚ ਬੇਬੇ ਨਾਨਕੀ ਭੈਣ ਨਾਨਕੀ ਆਈ ਹੋਈ ਸੀ ਆਪਣੇ ਸਹੁਰੇ ਘਰ ਤੋਂ ਇੱਥੇ ਹੀ सारा ਪਰਿਵਾਰ उडीक ਵਿੱਚ ਬੈਠਾ ਹੋਇਆ ਕਦੋਂ ਆਉਂਦੇ ਨੇ ਗੁਰੂ ਨਾਨਕ ਜੀ ਆਪਣੇ अपने ਸਮੇਤ ਆਪਣੇ ਘਰ ਆਣ ਕੇ ਪਰਿਵਾਰ ਨੂੰ ਦਰਸ਼ਨ ਦੇਣ ਵਾਸਤੇ ਆਏ ਤੇ ਜਿਸ ਵੇਲੇ ਵੇਖਿਆ ਮਾਤਾ ਤ੍ਰਿਪਤਾ ਦੇ ਤੇ ਆਪਣੇ ਪੁੱਤਰ ਰੂਪ ਗੁਰੂ ਨੂੰ ਗੱਲ ਨਾਲ ਲਾ ਲਿਆ ਉੱਠ ਕੇ ਆਲਮ ਜੀ ਇਸ ਕਥਾ ਨੂੰ ਬਿਆਨ ਕੀਤਾ ਕਹਿੰਦੇ ਨੇ ਹੋ ਗਿਆ ਸਾਗਰ ਖੁਸ਼ੀ ਦਾ ਉਮੜਿਆ ਦੁੱਖਾਂ ਦੀ ਢੇਰੀ ਟਹਿ ਗਈ ਮਾਤਾ ਜੀ ਲਾਵਣ ਪੁੱਤ ਨੂੰ ਘੁੱਟ ਕੇ ਕਲੇਜੇ ਨਾਲ ਜੀ ਮੁਖੜਾ ਨਾ ਚੁੰਮਦੇ ਰੱਜ ਦੇ ਆਖਣ ਸੁਣੋ ਖਾਂ ਲਾਲ ਜੀ ਦੁਨੀਆ ਨੂੰ ਫਿਰਦੇ ਤਾਰਦੇ ਤੇ ਬਖਸ਼ ਦੇ ਦੀਦਾਰ ਹੋ ਅੰਮੀ ਨੂੰ ਆਪਣੇ ਹਿਜਰ ਵਿੱਚ ਕਿਉਂ ਰੱਖਦੇ ਬੀਮਾਰ ਹੋ ਭੈਣ ਜੀ ਦਾ ਦਿਲ ਸਦਾਰੇ ਦਰਸ਼ਨਾਂ ਨੂੰ ਤਰਸਦਾ ਜਾਦ ਤੈਂਡੀ ਵਿੱਚ ਰੇ ਅੱਖਾਂ 'ਚੋਂ ਪਾਣੀ ਬਰਸਦਾ ਵਿਰਾਗ ਵਿੱਚ ਰਹਿੰਦੀ ਸਦਾ ਲੜ ਲਈ ਜੋ ਸੁਲਖਣੀ ਉਸ ਵੀ ਤੈਂਡਾ ਆਸਰਾ ਚਾਹੀ ਦੀ ਸੋਜੀ ਰੱਖਣੀ ਲਕshmi ਸ੍ਰੀ ਚੰਦ ਇਹ ਜੋ ਦੋਵੇਂ ਛੋਟੇ ਛੋਟੇ ਬਾਲ ਨੇ ਇਹਨਾਂ ਦੇ ਸੁਖਣਾ ਸੁਖ ਦੀ ਨੂੰ ਲੱਭੇ ਦੋ ਅਮੋਲਕ ਲਾਲ ਨੇ ਇਹਨਾਂ ਦੇ ਵੱਲ ਵੀ ਰੱਖਣਾ ਚਾਹੀਦਾ ਬੇਟਾ ਧਿਆਨ ਹੈ ਪੁੱਤਾਂ ਦੇ ਨਾਲ ਹੀ ਰੌਣਕਾ ਪੁੱਤਾਂ ਦੇ ਨਾਲ ਜਹਾਨ ਹੈ ਮਾਤਾ ਤ੍ਰਿਪਤਾ ਨੇ ਆਪਣੀ ਮਮਤਾ ਪ੍ਰਗਟ ਕੀਤੀ ਗੁਰੂ ਨੂੰ ਆਪਣਾ ਪੁੱਤਰ ਸਮਝ ਕੇ ਪਰ ਗੁਰੂ ਵਾਲੀ ਦ੍ਰਿਸ਼ਟੀ ਨਾਲ ਲਈ ਇਹ ਅੱਗੇ ਗੱਲਾਂ ਆਉਣਗੀਆਂ ਇਸ ਤਰੀਕੇ ਨਾਲ ਅਜੇ ਤ੍ਰਿਪਤਾ ਅਜੇ ਤ੍ਰਿਪਤੀ ਨਾ ਸੀ ਸਾਰੀਆਂ ਗੱਲਾਂ ਕੀਤੀਆਂ ਸਾਨੂੰ ਕਿਤੇ ਦਰਸ਼ਨ ਦਿਆ ਕਰੋ ਕਿੰਨਾ ਕਿੰਨਾ ਚਿਰ ਦਰਸ਼ਨ ਨੂੰ ਤਰਸਦੇ ਰਹਿੰਦੇ ਆ ਘਰ ਵਾਲੇ ਉਡੀਕਦੇ ਰਹਿੰਦੇ ਨੇ ਤੇ ਲਾਗੇ ਪਿਤਾ ਕਾਲੂ ਖਲੋਤੇ ਸਨ ਕਹਿੰਦੇ ਨੇ ਤ੍ਰਿਪਤਾ ਅਜੇ ਤ੍ਰਿਪਤੀ ਨਾ ਸੀ ਕਾਲੂ ਨੇ ਸੀਨੇ ਲਾ ਲਿਆ ਪੁੱਤਰ ਦਾ ਮੁਖੜਾ ਚੁੰਮਿਆ ਨੈਣਾ ਚੋਂ ਨੀਰ ਬਹਾ ਲਿਆ ਤੇ ਆਖਿਆ ਨਾਨਕ ਮੈਂ ਤੇਰਾ ਬਾਪ ਹਾਂ ਮੈਨੂੰ ਵੀ ਦਰਸ਼ਨ ਦਿਆ ਕਰ ਅੱਖਾਂ ਦਾ ਮੇਰਾ ਨੂਰ ਤੂੰ ਮੇਰੀ ਵੀ ਸੋਝੀ ਲਿਆ ਕਰ ਅਜੇ ਇੰਨੀ ਕੀ ਗੱਲ ਹੀ ਕੀਤੀ ਸੀ ਤੇ ਭੈਣ ਨਾਨਕੀ ਕੋਲ ਖਲੋਤੀ ਹੋਈ ਸੀ ਉਹਨ ਸੋਚਿਆ ਇਹ ਤੇ ਮੋਹ ਦੇ ਜਾਲ ਵਿੱਚ ਫਸ ਕੇ ਸਾਰੇ ਇਹ ਹੁਣ ਦੱਸਦੀ ਐ ਕਹਿੰਦੇ ਨੇ ਨਾਨਕੀ ਕਰਕੇ ਮੁਖਾਤਬ ਸਭ ਨੂੰ ਆਖੇ ਗੱਲ ਏ ਜਿਸ ਦੇ ਵਿਛੋੜੇ ਦਾ ਤੁਸਾਂ ਨੂੰ ਸਭ ਨੂੰ ਰਹਿੰਦਾ ਸੱਲ ਐ ਪੁੱਤਰ ਨਹੀਂ ਬਾਬਲ ਦਾ ਨਾਮ ਅਮੀ ਨੇ ਇਸ ਨੂੰ ਜਾਇਆ ਏ ਇਹ ਖੁਦ ਨਾਰਾਇਣ ਕਲਾਤ ਹਰ ਬਣ ਰੂਪ ਨਾਨਕ ਆਇਆ ਏ ਸਾਰੇ ਦੇ ਪੁੱਤਰ ਇਸ ਦੇ ਇੱਕੋ ਏ ਸਬਦਾ ਬਾਪ ਹੈ ਸਾਰੀ ਹੈ ਰਚਨਾ ਇਸ ਦੀ ਮਾਲਕ ਘਟਾਂ ਦਾ ਆਪ ਹੈ ਭਗਤਾਂ ਦੀ ਭਗਤੀ ਵੇਖ ਕੇ ਨੌਕਰ ਕਿਤੇ ਬਣ ਜਾਮ ਮਾਇਆ ਦਾ ਪਰਦਾ ਪਾ ਕਿਤੇ ਕੇਲੇ ਦੇ ਛਿੱਲੜ ਖਾਵੰਦਾ ਲੈ ਮਜੂਰੀ ਪ੍ਰੇਮ ਦੀ ਨਾਮੇ ਦੀ ਸ਼ਾਨ ਬਣਾਵੰਦਾ ਸੈਣੇ ਦਾ ਧਰ ਕੇ ਰੂਪ ਤੇ ਰਾਜੇ ਦਾ ਕੁਸਟ ਹਟਾਉੰਦਾ ਧੰਨੇ ਦੀ ਸਰਦਾ ਵੇਖ ਕੇ ਪੱਥਰ ਚੋਂ ਪਰ ਹੋ ਗਿਆ ਜਿੱਥੇ ਬਿਠਾਇਆ ਬਹਿ ਗਿਆ ਖਲਿਆਰਿਆ ਤੇ ਖਲੋ ਗਿਆ ਇਹ ਰੂਪ ਧਰ ਕੇ RAM ਦਾ ਸ਼ਵਰੀ ਨੂੰ ਕਿਦਰੇ ਤਾਰਦਾ ਕਿਦਰੇ ਸ਼ਬਾਤ ਅੰਦਰ ਸੁਦਾਮੇ ਦੇ ਮਹਲ ਉਸਾਰਦਾ ਆਦ ਅੰਤ ਅਵਤਾਰ ਇੱਕੋ ਰੂਪ ਕਈ ਬਦਲਾਮ ਦਾ ਜੋਤੀ ਤੇ ਜੁਗਤੀ ਇੱਕ ਹੈ ਕਾਇਆ ਹੈ ਫਿਰ ਪਲਟਾਮ ਭੈਣ ਨਾਨਕੀ ਨੇ ਸਾਰੀ ਗੱਲ ਖੋਲ ਕੇ ਰੱਖੀ ਕਿ ਜਿਹਦੇ ਵਿਛੋੜੇ ਦਾ ਤੁਹਾਨੂੰ ਹਮੇਸ਼ਾ ਦੁੱਖ ਪ੍ਰਗਟ ਕਰਦੇ ਹੋ ਇਹ ਅੱਜ ਨਹੀਂ ਇਹ ਤੇ ਸੰਸਾਰ ਦਾ ਕਰਤਾ ਹੈ ਜਦੋਂ ਤੋਂ ਦੁਨੀਆ ਬਣੀ ਹੈ ਉਦੋਂ ਤੋਂ ਅਵਤਾਰ ਧਾਰ-ਧਾਰ ਕੇ ਸੰਸਾਰ ਵਿੱਚ ਆ ਰਿਹਾ ਹੈ ਆਜ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਵਾਰਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ ਮੇਰਾ ਸਤਿਗੁਰੂ ਉਹ ਆ ਜਿਹੜਾ ਆਜ ਤੋਂ ਲੈ ਕੇ ਅੰਤ ਤੱਕ ਅਵਤਾਰ ਧਾਰ ਕੇ ਆ ਰਿਹਾ ਇਹ ਸਿੱਧਾ ਜੀ ਅਰਥ ਹੈ ਮੈਂ ਅਰਜ ਕਰ ਰਿਹਾ ਸਾਂ ਦਰਸ਼ਨ ਦੀ ਗੱਲ ਹੋ ਰਹੀ ਸੀ ਐਸਾ ਦਰਸ਼ਨ ਹੋਇਆ ਇਨ ਆਖਿਆ ਜੋਤ ਉਹ ਹਾਜੁਗਤ ਸਾਇਸ ਸਹ ਕਾਇਆ ਫੇਰ ਪਲਟੀਆਂ ਇਥੇ ਕਾਇਆ ਦਾ ਫਰਕ ਪੈਂਦਾ ਜੋਤ ਇੱਕੋ ਹੈ ਜੋਤੀ ਵੀ ਇੱਕੋ ਹੀ ਹੈ ਹਮੇਸ਼ਾ ਜੋਤ ਕਦੇ ਵੀ ਨਹੀਂ ਬਦਲੀ ਦੀਵਾ ਬਦਲ ਸਕਦਾ ਕੋਈ ਦੀਵਾ ਤੇ ਬਦਲ ਸਕਦਾ ਪਰ ਜੋਤ ਨਹੀਂ ਅਜ ਤੱਕ ਬਦਲੀ ਇਸੇ ਗੱਲ ਦੀ ਕਥਾ ਆਈ ਹੈ ਪਟਾਂ ਦੀ ਬਾਣੀ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਸਤਜੁਗ ਤੈ ਮਾਣਿਓ ਛਲਿਓ ਬਲਬਾਵਨ ਪਾਇਓ ਤ੍ਰਿਤੇ ਤੈ ਮਾਣਿਓ ਰਾਮ ਰਗਵੰਸ਼ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਅਭੈ ਭਗਤਾਂ ਜਨ ਦੀਓ ਕਲਿਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦ ਪੁਰਖ ਫਰਮਾਇਓ